ਸ਼ਲੋਕ ਮਹਲਾ ਤੀਜਾ ਰੇ ਜਨ ਉਥਾਰੈ ਦੱਬਿਓਏ ਸੁੱਤਿਆਂ ਗਈ ਵਿਹਾਇ ਤਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਉ ਆਦਮੀ ਨੂੰ ਕਿਹਾ ਵੀ ਤੂੰ ਉਥਾਰੇ ਦਾ ਦੱਬਿਆ ਤੂੰ ਉਂਗਲਾ ਦੱਬਿਆ ਹੈ ਉਹ ਕਹਿੰਦੀ ਨਾ ਜ ਆਦਮੀ ਨੂੰ ਹਾਂਜੀ ਦੀਨ ਦਾ ਜੋਰ ਜਿਹੜੇ ਗਿਆਨ ਕੰਨ ਕੱਟ ਕੰਮ ਕਰ ਦਿੰਦੇ ਆੱਖਾਂ ਵੀ ਝਾਕਦਾ ਨਹੀਂ ਹੈ ਆਖਾਂ ਆਪੇ ਮੀਂਹ ਜੰਦਗੀਆਂ ਨੇ ਇਹਨੇ ਸਾਨੂੰ ਔਰ ਅੱਖਾਂ ਨੂੰ ਸੂਤ ਲੱਗਿਆ ਹੋਇਆ ਸੂਤ ਕਾਹਦਾ ਸੂਤ ਕਾ ਧਰਮ ਦਾ ਸਭ ਤੋਂ ਜ਼ਰੂਰੀ ਕ ਧਰਮ ਹੈ ਧਰਮ ਦੇ ਵਿੱਚ ਦੱਬਿਆ ਹੋਇਆ ਦੇ ਵਿੱਚ ਦੱਬਿਆ ਹੋਇਆ ਤੂੰ ਸਾਰੀ ਤੇਰੀ ਉਮਰ ਚਲੀ ਗਈ ਗੁਰੂ ਨੇ ਉਪਦੇਸ਼ ਵੀ ਕੀਤਾ ਕੁਰਬਾਨੀ ਵੀ ਸੁਣੇ ਪਰ ਉਹ ਤੇ ਭਰੋਸਾ ਹੀ ਨਹੀਂ ਹੋ ਸਕਿਆ ਤੇ ਤੇ ਕੁਰਬਾਨੀ ਤੇ ਉੱਤੇ ਵੀ ਜਾਗਿਆ ਨਹੀਂ ਹੈ ਹਾਂਜੀ ਸਤ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਓ ਸਤ ਗੁਰ ਸ਼ਬਦ ਤਾਂ ਸੁਣਿਆ ਗੁਰਬਾਣੀ ਤਾਂ ਸੁਣੀ ਪਰ ਜਾਗਿਆ ਨਹੀਂ ਹੈਗਾ ਜਾਗਰ ਤਾਂ ਵਸਤਾ ਵੀ ਥਾ ਲੱਗਿਆ ਸੀ ਕੰਨਾਂ ਨੂੰ ਸੰਭਰੋ ਥਾ ਨਹੀਂ ਕਰਨ ਹੁੰਦਾ ਸਾਨੂੰ ਗੁਰਬਾਣੀ ਤੇ ਸਤ ਦਾ ਸ਼ਬਦ ਤਾਂ ਸੁਣਿਆ ਪਰ ਜਾਗਿਆ ਨਹੀਂ ਹੈਗਾ ਔਰ ਮਨ ਤੇ ਚਾਹ ਉਪਜਿਆ ਇਹ ਮੰਨਣ ਦਾ ਰਾਹਕੇ ਵੀ ਦਸੀ ਆ ਉਹ ਗੁਰਬਾਣੀ ਚ ਉਹ ਪ੍ਰਾਪਤੀ ਦਾ ਚੌਂ ਨਹੀਂ ਸੀ। ਪਰ ਲੋਕ ਦੇ ਸੁਆਨਨ ਦਾ ਚੌਂ ਨਹੀਂ ਪੈਦਾ ਹੋਇਆ। ਸ਼ਰੀਰ ਜਲੋਂ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਏ। ਗੁਣਾਂ ਤੋਂ ਜਿਹੜਾ ਸਖਣਾ ਹੈ ਨਾ ਹਿਰਦਾ ਉਹਦੇ ਵਿੱਚ ਤਾਂ ਜਲਣ ਰਹਿਣੀ ਹੋਈ ਰਹਿਣੀ ਹੈ। ਉਹ ਤਾਂ ਤ੍ਰਿਸ਼ਨਾ ਦੀ ਅੱਗ ਵੱਡਣੀ ਹੋ ਵੱਡਣੀ ਹੈ। ਕਿਉਂ ਜਲਦਾ ਕਿਉਂ ਤ੍ਰਿਸ਼ਨਾ ਦੇ ਅੱਗੇ ਗੁਣ ਹੈ ਨਹੀਂ ਅੰਦਰ ਗੁਣਾਂ ਤੇ ਸਖਣ ਗੁਣ ਨਹੀਂ ਪੈਦਾ ਕੀਤੇ ਤੋਂ ਬਾਹਰ ਆ ਜਿਹੜਾ ਸੀ ਹਿਰਦਾ ਉਹਦੇ ਚ ਤ੍ਰਿਸ਼ਨਾ ਦੀ ਜਿਹੜੀ ਤੁਖ ਸੀ ਤ੍ਰਿਸ਼ਨਾ ਮਾਇਆ ਦੀ ਤੁਖ ਸੀ ਉਹਦੇ ਨਾਲ ਜਲਣਾ ਹੁੰਦੀ ਰਹੀ ਹਾਂਜੀ ਅਬਰ ਹਾਂਜੀ ਠੀਕ ਹੈ ਜਗਤ ਜਲੰਦਾ ਡਿੱਠ ਮੈਂ ਹਉ ਦੂਜੇ ਭਾਈ ਮੈਂ ਦੇਖਿਆ ਸਾਰਾ ਜਗਤ ਚੱਲਦਾ ਮੈਨੂੰ ਦਿਖ ਰਿਹਾ ਮੈਨੂੰ ਦਿਖ ਰਿਹਾ ਸਾਰਾ ਹੀ ਸੰਸਾਰ ਕੋਈ ਕਹਿ ਨਾ ਵੀ ਚੱਲਦੇ ਦੀ ਗੱਲ ਕੀਤੀ ਹੈ ਕਿਸੇ ਦੇ ਹਿਰਦੇ ਦੀ ਦੂਜੇ ਨੂੰ ਵੀ ਪਤਾ ਲੱਗਿਆ ਦੂਜੇ ਦਾ ਹਿਰਦਾ ਚੱਲਦਾ ਤੇ ਅਬ ਮੈਨੂੰ ਸਾਰਾ ਸੰਸਾਰ ਦੀੰਗਾ ਚੱਲਦਾ ਐਵੇਂ ਨਹੀਂ ਮੈਂ ਕਹਤਾ ਜੋ ਮੈਂ ਕਿਹਾ ਉਹ ਦੇਖ ਕੇ ਕਿਹਾ ਬੋਲਣ ਜੋ ਪੇਖੇ ਅੱਖੀ ਜਗ ਤੇ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਕਾਹ ਕਿਹਾ ਮੇਰੂ ਰਖ ਲੈ ਗਲਵੇ ਨੂੰ ਸਾਰੇ ਨੂੰ ਕਿਰਪਾ ਕਰ ਸਾਰਾ ਸੰਸਾਰ ਜਲਦਾ ਗੱਲ ਨਹੀਂ ਹੈ ਵੀ ਨਹੀਂ ਜਲਦਾ ਹੈ ਹਾਂਜੀ ਨਾਨਕ ਗੁਰ ਉਭਰੇ ਸੱਚ ਮਨ ਸ਼ਬਦ ਧਿਆਏ ਆ ਨਾਨਕ ਕਹ ਜਿਹੜੇ ਗੁਰ ਦੀ ਛੱਡ ਚਲੇਦੇ ਉਹ ਉਭਰੇ ਨੇ ਜਲਨ ਤੋਂ ਉਹ ਜਾਗੇ ਨੇ ਜਾਗੇ ਨੇ ਉਹ ਨੀਚੋਂ ਉੱਪਰ ਗਏ ਉਹਨਾਂ ਨੇ ਉਹਨਾਂ ਦਾ ਸੂਤ ਜਿਹੜਾ ਲਹਿ ਗਿਆ ਨਾਲ ਕੇ ਸੂਤ ਕੇ ਉਹਨਾਂ ਉੱਤਰ ਗਿਆ ਉਹਨਾਂ ਦਾ ਸਾਰ ਗਿਆਨ ਗੁਰਬਾਣੀ ਨੂੰ ਵਿਚਾਰਿਆ ਗਿਆਨ ਲਿਆ ਉਹਦੇ ਨਾਲ ਤੋਰ ਦਾ ਸੂਤ ਗਿਆ ਉਹਨਾਂ ਦਾ ਉਹ ਉੱਪਰੇ ਉਹਨਾਂ ਨੂੰ ਜ਼ੋਰ ਲੱਗਿਆ ਉਹਨਾਂ ਨੂੰ ਹੋਸ਼ ਆਈਆ ਗੁਰਬਾਣੀ ਕੀ ਕਹਿੰਦੀ ਹੈ ਉਹਨਾਂ ਨੇ ਰੋੜਾ ਪਾਇਆ ਉਹ ਦੇਖੋ ਕੀ ਕਹਿੰਦੀ ਹੈ ਗੁਰਬਾਣੀ ਕੀ ਹੋ ਰਹੀਏ ਗੱਲਾਂ oye oye oye gallan da kehndi onu gurbani chdiyan asi kar rahe ha ohne paaya raula ha ਜੇ mohalla tija shabd ratte homai gai shobhavanti nar pir ਉਹ ਏਹੀ ਬੁੱਧ ਬਦਲ ਗਈ ਬੁੱਧ ਬਦਲੀ ਸਿੱਧ ਪਾਈ ਯਾਰ ਦਾ ਮਤਲਬ ਇਤੇ ਬੁੱਧੀ ਹੈ ਬੁੱਧ ਬਦਲ ਗਈ ਨਾ ਜਦ ਬੁੱਧ ਬਦਲੀ ਤਾਂ ਸੋਭਾਵੰਤੀ ਬਣ ਗਈ ਬਾਣੀ ਜਿਹਨਾਂ ਲਿਖੀ ਹੈ ਬੋਲੀ ਹੈ ਸੋਭਾਵੰਤੀ ਨਾਲ ਉਹ ਬੁੱਧੀ ਬੇਕ ਬੁੱਧੀ ਸੀ ਬੇਕ ਬੁੱਧੀ ਸੋਭਾਵੰਤੀ ਨਾਲ ਹੁੰਦੀ ਹਾਂਜੀ ਭਾਣੇ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ ਉਹਦਾ ਸ਼ਿੰਗਾਰ ਕਿਉਂ ਬਣਿਆ ਸਾਰੇ ਗੁਣ ਉਹਨਾਂ ਨੇ ਧਾਰ ਕਿਵੇਂ ਮਲੇ ਨਸਤਲ ਗੁਣਾਂ ਨਾਲ ਹਾਰ ਉਹਦੇ ਕਿਵੇਂ ਪੈ ਗਿਆ ਉਹ ਹੁਕਮਾਂ ਦੇ ਵਿੱਚ ਆਸੀ ਫਿਰ ਕੇ ਪਾਣੀ ਚੱਲਦੀ ਹੈ ਗੁਰਬਾਣੀ ਅਨੁਸਾਰ ਜੀਉਂਦੀ ਹੈ ਗੁਰਬਾਣੀ ਹੁਕਮ ਹੈ ਫਿਰ ਕੇ ਪਾਣੀ ਨੂੰ ਸਮਝ ਆਇਆ ਅਨੁਸਾਰ ਜੀਵਨ ਜੀਉਣਾ ਗੁਣ ਧਾਰਨ ਕੀਤੇ ਨੇ ਇਹ ਹੀ ਸ਼ਿੰਗਾਰ ਹੈ ਜਿਹੜਾ ਮੂੰਹ ਕਾਲਾ ਸੀ ਉਹ ਹੋ ਗਿਆ ਹਾਂਜੀ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਤੇਜ ਸੁਹਾਵੀ ਸਰਦੇ ਦੇ ਵਿੱਚ ਸੁੱਖ ਆਉਦੇ ਸਰਦੇ ਵਿੱਚ ਬਸੰਤ ਹੋ ਗਈ ਬਸੰਤ ਰੁੱਤ ਨਾਨਕ ਤੇਨਾ ਬਸੰਤ ਹੈ ਉਹਨਾਂ ਦੇ ਬਸੰਤ ਹੋ ਗਿਆ ਫਿਰ ਆਪਣਾ ਮੂਲ ਹੈ ਜਿਹੜਾ ਉਹਦੇ ਨਾਲ ਅੰਦਰ ਰਲ ਹੋਈ ਹੋਈ ਹੈ ਖੁੱਦ ਨਹੀਂ ਚਿੰਤਾ ਰੰਗ ਲੜਿਆ ਕਿ ਰਚਨਤਾ ਹੀ ਨਹੀਂ ਹੈ ਸਿਰੇ ਦੀ ਹੈ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਉਈ ਭੈ ਦੇ ਕੋਲ ਨਹੀਂ ਤੇ ਇਹ ਅਵਸਥਾ ਬਣੀ ਹੋਈ ਹੈ ਪਰ ਉਹ ਆਨੰਦ ਦੀ ਅਵਸਥਾ ਬਣੀ ਹੋਈ ਹੈ ਬਹੁਤ ਮੁਕਤ ਹੈ ਉਹਨਾਂ ਦਾ ਜੀਵਨ ਜੀਵਨ ਨਾ ਹਰ ਮਰੈ ਨਾ ਕਦੇ ਦੁੱਖ ਲੱਗੈ ਸਦਾ ਸੁਹਾਗਣ ਨਾਰ ਸੁਹਾਗ ਨਹੀਂ ਤਾਂ ਕਦੇ ਨਹੀਂ ਨਹੀਂ ਉਹਨੂੰ ਸੁਖੇ ਸੁਖ ਹੈ ਜੀਵਨ ਸੁਹਾਗ ਨਹੀਂ ਕਿੰਤਾ ਉਹਨੂੰ ਦੁੱਖੇ ਦੁੱਖ ਹੈ ਕਿੰਤਾ ਇਹ ਰਹੀ ਨਾ ਹਾਰ ਕਦੇ ਮਰਦਾ ਨਹੀਂ ਹਾਲ ਦੇ ਕਦੇ ਮਰਦਾ ਨੀ ਉਹਨੇ ਦੁਆਗਣ ਹੋਣਾ ਨਹੀਂ ਉਹਨੇ ਬੁਧਵਾ ਹੋਣਾ ਨੀ ਇਸ ਕਰਕੇ ਉਹਨੂੰ ਚਿੰਤਾ ਹੈ ਨਹੀਂ ਸਦਾ ਸੌਧਾ ਰਹਿਣੀ ਕਿਹਾ ਹਰ ਪ੍ਰਭ ਮੇਲ ਲਈ ਗੁਰ ਕੈ ਹਰ ਪ੍ਰਭ ਨੇ ਮੇਲ ਲਈ ਜਿਹਦਾ ਗੁਰ ਨਾਲ ਪਿਆਰ ਹੁੰਦਾ ਜਿੰਨ ਪ੍ਰੇਮ ਕਿਓ ਤੇ ਵੀ ਜੀ ਜੀ ਦੇ ਅੰਦਰ ਪ੍ਰੇਮ ਸੀ ਬੁੱਤਦੇ ਅੰਦਰ ਪ੍ਰੇਮ ਭਾਲੀ ਨੋਮਿਆ ਹਾਲ ਦੇ ਹਾਲ ਜਿਵੇਂ ਲਾਲ ਹੀ ਮੇਰੀ ਫਿਰ ਦੇ ਚ ਜਗਾ ਦਿੱਤੀ ਆਪਣੇ ਚਲਣਾ ਤੇ ਜਗਾ ਦਿੱਤੀ ਹੋ ਮੂਲ ਅੱਛਾ ਕਿਉਂਕਿ ਹਰ ਪ੍ਰਭ ਹੈ ਨਾ ਉਹ ਅੱਗੇ ਅੱਜ ਜਾ ਕੇ ਇਹਲੀ ਸਟੇਜ ਆਲਾ ਸੁੱਖ ਹੈ ਸੰਸਾਰ ਤੋਂ ਚ ਟਿਕਾ ਹੋਇਆ ਉਹ ਸੁੱਖ ਹੈ ਕਿ ਆਪਣੇ ਮੂਲ ਦੀ ਗੱਲ ਹੈ ਜੀ ਮੇਲ ਦਾ ਮਤਲਬ ਕੋਈ ਕੋਣਾ ਇਹ ਗਿਆਨ ਦੇ ਨਾਲ ਇਹ ਹੇਤ ਰੱਖਿਆ ਫਿਰ ਇਹ ਪਾਣਾ ਵਰਤਿਆ ਹਾਂ ਜੀ ਆ ਜਿਹੜਾ ਗਿਆਨ ਹੈ ਇਹ ਗਿਆਨ ਦੇ ਨਾਲ ਸ਼ਬਦ ਦੇ ਨਾਲ ਪ੍ਰੇਮ ਰੱਖਿਆ ਪਹਿਲਾਂ ਉਸ ਜਿਨਾਂ ਨੇ ਆਪਣੇ ਅੰਦਰ ਆਤਮਾ ਦੀ ਆਵਾਜ਼ ਅਨੁਸਾਰ ਅੰਤਰਾਤਮਾ ਦੀ ਆਵਾਜ਼ ਤੱਕovali ਉਹ ਭੈੜਾ ਆਦਮੀ ਨਹੀਂ ਉਹ ਤਾਂ ਗੁਰੇ ਆਦਮੀ ਹੁੰਦੇ ਨੇ ਗੁਰਬਾਣੀ ਸੁਣੀ ਸਮਝ ਲਈ ਮੰਨ ਲਈ ਵੀ ਹਾਂ ਠੀਕ ਹੈ ਬਿਕਨ ਵਿਰੋਧ ਕਰਦਾ ਹੈਗਾ ਨਹੀਂ ਨਹੀਂ ਨਹੀਂ ਨਹੀਂ ਜੀ ਨੇ ਇਹ ਕੰਮ ਕੀਤਾ ਗੁਰਬਾਣੀ ਤੋਂ ਫਟਾਣ ਲਿਆ ਕਿ ਆਰ ਅੰਦਰੋਂ ਮੰਨ ਲਿਆ ਵੀ ਠੀਕ ਹੈ ਅੰਤਰਾਤਮਾ ਨੂੰ ਅੰਦਰੋਂ ਗੁਰਬਾਣੀ ਤੋਂ ਮੰਨ ਲਿਆ ਵੀ ਠੀਕ ਹੈ ਪਰ ਬਹਾਲਾ ਕਹਿੰਦਾ ਵੀ ਨਹੀਂ ਇਹ ਤਾਂ ਬਰੋਸ ਕਰਦਾ ਉਹਨੂੰ ਭੋਲੇ ਨਾਮ ਨੇ ਉਹ ਗਿਰੀ ਆਈ ਉਹਦੇ ਜੁਤਰੀ ਕੰਨ ਵੀ ਆ ਜਾਂਦਾ ਰਾਮ ਰਾਏ ਵੀ ਆ ਜਾਂਦਾ ਤੇ ਹੋਰ ਜਿਹੜਾ ਪੰਡਤ ਹੈ ਉਹ ਵੀ ਆ ਜਾਂਦਾ ਜੋਗੀ ਵੀ ਆ ਜਾਂਦੇ ਜਿੰਨੇ ਦੀ ਗੱਲ ਹੋਈ ਹੈ ਗੁਰੂ ਘਰ ਵਾਲਿਆਂ ਦੀ ਜਿਹਨਾਂ ਨੇ ਅੰਦਰ ਮੰਨ ਗਿਆ ਬਾਹਰੋਂ ਬਰੋਸ ਕਰਦੇ ਨੇ ਕਿਉਂ ਵੀ ਅਸੀਂ ਹੋਰ ਕਿਵੇਂ ਕਹਿ ਦਈਏ ਉਹ ਤਲਵਾੜਾ ਕਹਿੰਦਾ 60 ਸਾਲ ਹੋ ਗਏ ਬੈਗਦੂ ਬੈਗਦੂ ਕਿਹੜੇ ਹੋਣ ਆਪੀਏ ਹੁਣ ਅਸੀਂ ਇਹ ਨਾਮ ਨਹੀਂ ਹੈ ਅੰਦਰਲਾ ਤਾਂ ਮੰਨ ਲਿਆ ਵੀ ਗੱਲ ਠੀਕ ਹੈ। ਕਹਿੰਦਾ ਹੁਣ ਬੇਜਿੱਤੀ ਹੈ। ਸਾਲ ਹੋ ਗਏ। ਜੇ ਹੋ ਤੇ ਯੋਗ ਬੋਲੇ ਰੇ। ਹਾਜੀ ਹਰ ਜਿਓ ਤਿੰਨ ਕਾ ਦਰਸ਼ਨ ਨਾ ਕਰੋ। ਪਾਪ ਸੱਟ ਹਤਿਆਰੀ। ਹਰ ਜਿਓ ਵਨੋਰਾ ਦੂਰ ਰੱਖੀ ਮੈਨੂੰ। ਉਹ ਪਾਪੀ ਨਾਲ ਨੇ ਹਤਿਆਰੇ ਹੋ ਉਸਤਾਰਾ ਪੌਣ ਨੇ। ਉਹ ਕੁਲ ਘਾਤੀ ਨੇ ਆਪਣੇ ਕੁਲ ਦੇ ਬੰਦਿਆਂ ਨੂੰ ਗੁਰਖਾ ਜਨਮ ਨੂੰ ਖਨਾਗਵਾ ਰਹੇ ਨੇ ਜਿਹੜੇ ਮੁੁਰਖਾਂ ਨੂੰ ਉਲਟਾ ਉਪਦੇਸ਼ ਕਰਕੇ ਉਹਦਾ ਜਨਮ ਖਰਾਬ ਕਰ ਰਹੇ ਨੇ ਉਹ ਕੁਲ ਘਾਤੀ ਨੇ ਮਹਾ ਹਤਿਆ ਰਹੇ ਦਾ ਦਰਸ਼ਨ ਮੈਨੂੰ ਦੀ ਸੰਖਿਆ ਕਰਵਾ ਦੂਰ ਰੱਖੋ ਹਾਂਜੀ ਉਹ ਘਰ ਘਰ ਫਿਰੇ ਕਿ ਮਨ ਜਿਉਂ ਧਰ ਘਟ ਨਾਰੀ ਉਹ ਘਰ ਘਰ ਤੁਰਦੇ ਨੇ ਲੋਕਾਂ ਕੋਲ ਆਪਾਂ ਬਣਾਉਂਦੇ ਆ ਵੀ ਲੋਕਾਂ ਨੂੰ ਆਪਣਾ ਜੋੜ ਕੇ ਰੱਖਣ ਕਿਤੇ ਬਾਗੀ ਨਾ ਹੋ ਜਾਣ ਨਾ ਕਿਤੇ ਗੁਰਬਤ ਨੂੰ ਨਾ ਮਾਣ ਲੈਣ ਪਾਣੀ ਕਿਤੇ ਸਾਰਾ ਸਿਸਟਮ ਸਾਡੇ ਨਾਲੋਂ ਲੋਕ ਸਾਰੇ ਟੁੱਟ ਜਾਣ ਐ ਉਹ ਘਰ ਘਰ ਫਿਰ ਕੇ ਉਹ ਲੋਕ ਜੋੜ ਕੇ ਰੱਖਦੇ ਤੂੰ ਸਭ ਮਨ ਮਨ ਦੇ ਵਿੱਚ ਉਹਨਾਂ ਦਾ ਮਨ ਸ਼ੁੱਧ ਨਹੀਂ ਹੈ ਸ਼ੁੱਧ ਮਨਾਂ ਨਹੀਂ ਫਿਰਦੇ ਲੋਕਾਂ ਨੂੰ ਡੋਬੋ ਵਾਸਤੇ ਫਿਰ ਰਹੇ ਨੇ ਉਹ ਸਾਨੂੰ ਵਾਸਤੇ ਹੀ ਬਲ ਰਹੇ ਆਪਣੀ ਜਿਹੜੀ ਪਾਰਟੀ ਆ ਉਹਨੂੰ ਖੜੀ ਰਹੇ ਆਪਣੀ ਗੱਲ ਉਹਦੇ ਵਾਸਤੇ ਸੱਜਣ ਕੁਛੋ ਤੋਂ ਬੰਦ ਜਿਵੇਂ ਆ ਬੇਸਵਾ ਔਰਤਾਂ ਹੈਗੀ ਮਤਲਬ ਗੰਦਗੀ ਫਲਾਉਂਦੇ ਫਿਰਦੇ ਹਾਂ ਜੀ ਹਾਂ ਭਾਗੀ ਸੰਗਤ ਮਿਲੇ ਗੁਰਮੁਖੀ ਸਵਾਰੀ ਵੱਡੇ ਭਾਗਾਂ ਨਾਲ ਸੰਗਤ ਮਿਲਦੀ ਆ ਗੁਰਮੁਖਾਂ ਦੀ ਗੁਰੂ ਦੀ ਸੰਗਤ ਵੱਡਿਆਂ ਦਾ ਮਿਲਦੀ ਹੈ ਜਿਹੜੀ ਸਿਵਰੀ ਹੋਈ ਸੰਗਤ ਹੋਵੇ ਜਿਹਦਾ ਹੰਦਾ ਛੁੱਟ ਹੋਵੇ ਨਾ ਐ ਜੀ ਆ ਜੀ ਗੁਰ ਕਉ ਬਲਹਰ ਹੈ ਸਤਗੁਰ ਮਿਲਿਤ ਦਇਆ ਕਰ ਕਿਰਪਾ ਕਰ ਮੈਨੂੰ ਐ ਜੀ ਸੰਗਤ ਮੈਨੂੰ ਐ ਸੰਗਤ ਅਜਿਹੀ ਜੀ ਤਾਂ ਹੈ ਜੀ ਚੁੱਧ ਹੋਵੇ ਜਿਹੜੀ ਗੁਣ ਗੁਣ ਹੋਣ ਉੱਗਣ ਤਿਆਗਿਆ ਹੁਣ ਉੱਗਣ ਸਾਧਨ ਦੀ ਸ਼ੁਰੂ ਕਰੀ ਚਾਹੀਦੀ ਉਹ ਕਰਨ ਤਾਂ ਮਲਾ ਮੈਨੂੰ ਜਿਹੜੀ ਗੁਰੂ ਦੀ ਭੁੱਖ ਪਿਆਰੇ ਮੈਲੀ ਜੀ ਨਾਮ ਕਿਤਾਬੇ ਇਹ ਜੀ ਕੀਤੀ ਜੀ ਜੀ ਜੀ ਇੱਥੇ ਪੌੜੀ ਦੀ ਸਮਾਪਤੀ ਹੈ ਜੀ ਹਾਂ